अप्पे पार न पावही मूड़े परपंच तू पलच रहया ओ तो परपंच, परपंच है जो है परपंच है संसार ही कामकार सारा परपंच है परपंच नु होया है जेवे कोई दुनियाबी डरब दे रो दे दुनियाबी काम कर ਜਿਹੜੇ ਗੁਰਦਾਰੇ ਬਣਾਉਣੇ ਲੰਗਰ ਦੇ ਚਲਾਉਣੇ ਆਹ ਕੰਮ ਉਹ ਜੀ ਅਸੀਂ ਆਨਾਤ ਬੱਚਿਆਂ ਨੂੰ ਕਰ ਰਹੇ ਹੇ ਪਰਪੰਚ ਦੇ ਸਾਹ ਪਿਰੋ ਪਰਪੰਚ ਭਗਤਾਂ ਨੇ ਜਿਹੜੇ ਕੰਮ ਸ਼ੁਰੂ ਕਰ ਲੈ ਗੁਰੂ ਕਾਲ ਦੇ ਜਿਹੜੇ ਨਹੀਂ ਕੰਮ ਕੀਤੇ ਅਸੀਂ ਸ਼ੁਰੂ ਕਰ ਲੈ ਹੋਰ ਮੱਤਾ ਕਰਦੀਆਂ ਸੀ ਗੁਰੂ ਕਾਲ ਨੇ ਨਹੀਂ ਕੀਤੇ ਜਿਹੜਾ ਗੁਰੂ ਕਾਲ ਨੇ ਕੰਮ ਕੀਤਾ ਤੁਹਾਨੂੰ ਕਹਿੰਦੇ ਕੀਤਾ ਉਹ ਅਸੀਂ ਛੱਡ ਦੋ ਤਾਂ ਦੇਖੋ ਜੋ ਭਗਤਾਨੇ ਕੰਮ ਕੀਤੇ ਜਿਹੜੀ ਲੈ ਤੇ ਉਹ ਚੱਲੇ ਉਹ ਅਸੀਂ ਵਿਚਾਰਿਆਂ ਦੀ ਵੀ ਉਹਨਾਂ ਨੇ ਕੀ ਕੀਤਾ ਡੇਰੇ ਬਣਾਉਣ ਲੱਗੇ ਬڑے-ਬڑے ਹੋਰ ਕੁਝ ਬਹੁਤ ਕਰਨ ਲੱਗੇ ਉਹਨਾਂ ਨੇ ਕੁਝ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਇਹ ਕੁਝ ਪ੍ਰਪਲਜ ਨਹੀਂ ਕੀਤਾ ਤਾਂ ਉਹਨਾਂ ਨੇ ਧਰਮ ਕਮਵਾ ਲਿਆ ਕੁਝ ਸਾਨੂੰ ਦੇਤ ਦਾ ਸੰਸਾਰ ਨੂੰ ਸ਼ਬਦ ਵਿਚਾਰ ਕਰ ਲਿਆ ਸ਼ਬਦ ਵਿਚਾਰ ਛੱਡ ਕੇ ਸ਼ਬਦ ਵਿਚਾਰ ਦੇ ਵਿੱਚੋਂ ਕੁਝ ਪ੍ਰਾਪਤ ਕਰਕੇ ਉਹ ਬਗ ਬਤਲਦਾ ਬੱਡਰ ਦੇ ਭਜਾਏ ਅਸੀਂ ਕੁਝ ਹੋਰੇ ਦੇ ਵਿੱਚ ਢਿੱਡ ਦੀ ਭੁੱਖ ਦੀ ਸੀ ਮਾਇਆ ਦੀ ਸੀ ਲੋੜ ਮਾਇਆ ਦੀ ਸੀ ਮਾਇਆ ਲੈ ਕੰਮ ਕਰਦੇ ਸੀ ਅਸਲ ਤੇ ਅੰਦਰ ਸਾਡੇ ਭੁੱਖੇ ਮਾਇਆ ਦੀ ਗੇ ਦੁਦੇ ਜਦੋਂ ਲੈਦੇ ਬਗ ਨੇ ਦੋ ਚਾਰ ਆਦਮੀ ਇਕੱਠੇ ਹੋਏ ਉਹਨਾਂ ਨੇ ਕੋਈ ਸੰਸਥਾ ਬਣਾ ਲਈ ਆਦੋ ਸਾਡੋ ਆਦੋ ਕਿਸੇ ਨੇ ਕੋਈ ਰੇਡੀਓ ਸਟੇਟ ਕੀਤਾ ਹੈ ਕਿਸੇ ਕੁਝ ਕੁਝ ਇਹ ਇਹ ਤੇ ਗੁਰਮਤਿਆਂ ਗਿਆਨ ਕੋਈ ਹੈ ਜੀ ਇਹ ਪਰਪਲ ਸਭ ਧਰਮ ਦੇ ਨਾਮ ਤੇ ਜਿਹੜੇ ਕਰਮ ਨੇ ਨਾ ਧਰਮ ਦੇ ਨਾਮ ਤੇ ਕਰਮ ਸਾਰੇ ਪਰਪਲ ਚੀਜ਼ ਇਹ ਪਰਪੰਚਾਂ ਦੇ ਵਿੱਚ ਤੂੰ ਉੜ ਜਾ ਹੁੰਦੇ ਉੜ ਜਾ ਹੁੰਦੇ ਸਾਰੇ ਉੜ ਜਾ ਹੁੰਦੇ ਪਹਿਲਾਂ ਵੀ ਉੜ ਜਾ ਹੁੰਦੇ ਜਿਹੜੇ ਉੜ ਜਾ ਹੁੰਦੇ ਉਹਨਾਂ ਨੂੰ ਕਿਹਾ ਅਸੀਂ ਆਪ ਉੜ ਜੀਏ ਸਿੱਖ ਵੀ ਉਹ ਦੀ ਸਾਰੇ ਪਰਪੰਚਾ ਦੇ ਵਿੱਚ ਉੱਥੇ ਪੈਸੇ ਨੇ ਪੈਸੇ ਦਾ ਟਰੋਜੇ ਨੇ ਬਾਆ ਵਾਸਤੇ ਜਿਹੜੇ ਲੋਕਾਂ ਨੂੰ ਕਦੇ ਸਾਈਕਲ ਨਹੀਂ ਸੀ ਮਿਲਣਾ ਘਰ ਆਪਣੇ ਉਹ ਕਾਰਨ ਚੋੜੇ ਫਿਰਦੇ ਨੇ ਜੀ ਪਰ ਨਹੀਂ ਤਾਂ ਪਰ ਪੁੱਛਿਆ ਸਰਦਾਰ ਤੁਹਾਨੂੰ ਤਾਂ ਆਣ ਵਾਸਤੇ ਆਏ ਕਾਰਨ ਦੇ ਝੂਟੇ ਲੈਣ ਵਾਸਤੇ ਆਏ ਸੀ ਆਰਾਮ ਦੀ ਰੋਟੀ ਵਧੀਆ ਮਿਲਦੀ ਹੈ ਘਰ ਮਿਲਦੀ ਜੀ ਸੀ ਔਰ ਜਲਬ ਚਲਾ ਗਿਆ ਜੇ ਕਰਨਾ ਹੀ ਨੇ ਉਹਨਾਂ ਦੇ ਜਲਬ ਸੀ ਖਰਾਬ ਹੋ ਰੋ ਜਨ ਖਰਾਬ ਹੋ ਗਿਆ ਜੀ ਹਾਂ ਖਰਾਬ ਨਹੀਂ ਹੋਇਆ ਜਰਕਾਂ ਵੱਲੋਂ ਚਲੇ ਗਏ ਹਾਂ ਹਾਂ ਆਪ ਖੁਆਏ ਹੋ ਤੇਰਾ ਲੇਖ ਪਿਆ ਆਪਣੇ ਆਪ ਨੂੰ ਤਾਂ ਬੜਾ ਹੁਸ਼ਿਆਰ ਸਮਝਦਾ ਗੁਰਬਾਣੀ ਨੂੰ ਮੂੜਾ ਕਹਿ ਦਿਆ ਮੂੜਾ ਕਹਿ ਦਿਆ ਜੇ ਆਪਣਾ ਆਪ ਹੀ ਬਗਾਲ ਲਿਆ ਆਪਣੇ ਨੁਕਸਾਨ ਕਰ ਲਿਆ ਉਹ ਕਹਿੰਦਾ ਨਾ ਲੋਕਾਂ ਨੂੰ ਧੋਖਾ ਦੇ ਰਿਹਾ ਧੋਖਾ ਆਪਣੇ ਆਪ ਨੂੰ ਦੇ ਰਿਹਾ ਅਸਲ ਵਿੱਚ ਕੋਈ ਕਿਸੇ ਨੂੰ ਧੋਖਾ ਨਹੀਂ ਦੇ ਸਕਦਾ ਉਹ ਜਿਹੜੇ ਲੇਖੇ ਪੈ ਜਾਂਦਾ ਤੁਹਾਡਾ ਕੀ ਹੈ ਤੁਸੀਂ ਜੋ ਉਲਟੀ ਸਿੱਖਿਆ ਦਿੱਤੇ ਉਹ ਸਾਡਾ ਤਾਂ ਜੀਵਨ ਖਰਾਬ ਕਰਦੇ ਹੋ ਸਭ ਤੁਹਾਨੂੰ ਨਿਹਰੇ ਫੜ ਲੋਕਾਂ ਦਾ ਸਾਰਾ ਬੋਝ ਤੁਹਾਡੇ ਤੇ ਪੈ ਜਾਣਾ ਹਾਂ ਜਿਹੜੇ ਅਗੂੜੇ ਦਾ ਜ਼ਿਲਤ ਹੁੰਦੇ ਸਾਰੇ ਜਿਹਨਾਂ ਦਾ ਜੀਵਨ ਨੁਕਸਾਨ ਹੁੰਦਾ ਉਹ ਤਾਂ ਦਾਨ ਕਰਦੇ ਨੇ ਉਹਨਾਂ ਦਾ ਤਾਂ ਲਿਖ ਪੈਗਾ ਖਰਚਾ ਤੁਹਾਡੇ ਤੋਂ ਵਸੂਲ ਹੋਣਾ ਉਹਨਾਂ ਦਾ ਉਹਨਾਂ ਉਹਨਾਂ ਦਾ ਦਾਨ ਉਹ ਤਾਂ ਜ਼ਦਾਰੀ ਰ ਕਰਦੇ ਨੇ ਵਿਚਾਰੇ ਉਲੂ ਤੋਂ ਪਤਾ ਨਹੀਂ ਹੈ ਉਹ ਤਾਂ ਸੱਚਮੁੱਚ ਹੀ ਕਰਦੇ ਨੇ ਵੀ ਇਹ ਚੰਗੀ ਗੱਲ ਹੈ ਇਹ ਕਾਉਣ ਵਾਲੇ ਨੇ ਉਹ ਉਹਨੂੰ ਪਤਾ ਉਹ ਇਹਦਾ ਫਿਰ ਕਰਦੇ ਨੇ ਜੀ ਰੋਹਲ ਵਾਲਿਆਂ ਪਤਾ ਹੈ ਵੀ ਅਸੀਂ ਤੇ ਸਿੱਖ ਦਾਦਾ ਇਹਨਾਂ ਪੜਿਆ ਨਾ ਉਹਨਾਂ ਦੇ ਦੱਸੋ ਕਿ ਗਿਆਨ ਪੜਿਆ ਹੋਇਆ ਹੈ। ਫਾਈ ਲੱਗੀ ਜਾਤ ਫਾਹੇ। ਯਾਰ ਆਪਣੇ ਲੋਕਾਂ ਨੂੰ ਉ르ਤੀ ਸਕਿਆ ਤੇ ਕਿ ਜਾਤ ਨੂੰ ਫਾਹੇ। ਜਦ ਜਾਲ ਚ ਫਸਾ ਰਹੇ ਤੇ ਅੱਗੇ ਨਹੀਂ ਤੋਂ ਅੱਗੇ ਤਾਂ ਕੋਈ ਜਦਾਂ ਨਹੀਂ ਉਹਨਾਂ ਵਾਸਤੇ। ਜੀ। ਇਹ ਸਖਰ ਕੇ ਉਹਨੂੰ ਗੂੜੇ ਕੇ ਬਲੇ ਆਪਣੇ ਆਪ ਬੜੇ ਸੰਤ ਬਣੀ ਬੈਠੇ ਨੇ ਨਾ ਔਰ ਆਗੂ ਬੜੇ ਬੈਠੇ ਨੇ ਜਿਵੇਂ ਬਦੀਆਂ ਬੁਲਾਈ ਬੈਠੇ ਨੇ ਉਹ ਸਾਰਿਆਂ ਤੇ ਲੱਗਉਂਦੀ ਹੈ ਗੱਲ ਜੀ ਬੰਦੇ ਕੋਈ ਜੜੀ ਆ ਉਹਨਾਂ ਦੇ ਬੰਦੇ ਕੋਈ ਨਹੀਂ ਆ ਸਾਰਿਆਂ ਤੇ ਲੱਗਉਂਦੀ ਹੈ ਔਲੀ